श्लोक मोहल्ला 5वां हिरणाकी को सच वैण सुनाई जो तो करे उदाहरण सुंदर बचन तुम सुनो छबीली फिर टेंडा मन साधारण हिरणाकी हिरण वरगी आंख वाली विवेक बुद्धि हिरण दी आंख जेडी हुंदी तेज हुंदी है चपकदा बहुत है हिरण आंख नु को ਸੱਚ ਦੀ ਗੱਲ ਆਖੀ ਹੈ ਉੱਪਰ ਜੋ ਆਖੀ ਹੈ ਸੱਚੀ ਗੱਲ ਆਖੀ ਜੋ ਤੋ ਕਰਿਆ ਆਧਾਰਨ ਜਿਹੜਾ ਤੂੰ ਆਧਾਰ ਕਰ ਲਈ ਹੈ ਸੰਸਾਰ ਦਾ ਗੱਲ ਠੀਕ ਹੈ ਉਦਾਰ ਹੋ ਰਿਹਾ ਹੈ ਜੋ ਕਹਿ ਰਹੀ ਹੈ ਬੇਫੁੱਦੀ ਜੋ ਕਹਿ ਰਹੀ ਹੈ ਗੁਰਮਖੀ ਜੋ ਕਹਿ ਰਹੀ ਹੈ ਗੱਲ ਸੱਚ ਹੈ ਇਹਦੇ ਨਾਲ ਸੰਸਾਰ ਦਾ ਉਦਾਰ ਹੋ ਸੁੰਦਰ ਬਚਨ ਤੂੰ ਸੁਣੋ ਛਬੀਲੀ ਫਿਰ ਬਚਨ ਤੇਰੇ ਬੜੇ ਸੁੰਦਰ ਨੇ ਇਸੇ ਹਾਲ ਕੀ ਬਿੱਲੀ ਤੁਸੜੂ ਪਰ ਜਿਹੜਾ ਤੇਰਾ ਹੈ ਕਹਿੰਦਾ ਬਹੁਤ ਸਾਧਾਰਨ ਉਸ ਦੇ ਵਿੱਚ ਬਣਾ ਨੂੰ ਸੁਧਾਰ ਕਰਨ ਵਾਲਾ ਮਨ ਵਿੱਚ ਸਾਧਾਰਨ ਮਨ ਬੜਾ ਨਹੀਂ ਹੈ ਬਣਾ ਨੂੰ ਠੀਕ ਕਰਨ ਵਾਲਾ ਹੈ ਸੁਧਾਰ ਲੈਉਣ ਵਾਲਾ ਹੈ ਮਨ ਵਿੱਚ ਹੋਏ ਮਨ ਨੂੰ ਸੁਧਾਰਨ ਵਾਲਾ ਤੇਰਾ ਤੇਰਾ ਜਿਹੜਾ ਚਿੱਤ ਹੈ ਜਿਹੜਾ ਇਹਨਾਂ ਦੇ ਔਗਣ ਦੂਰ ਕਰ ਹਾਂਜੀ ਸੁੰਦਰ ਬਚਨ ਤੂੰ ਸੁਣੋ ਸਬੀਲੀ ਇਹ ਕਿਉਂ ਕਹਿਇਆ ਜਾ ਰਿਹਾ ਬੇਵਕੁੱਦੀ ਰੁਕਾ ਰਿਹਾ ਨਾ ਜੀ ਨਾ ਰਹੀ ਹੈ ਅੱਛਾ ਇਹ ਫਿਰ ਕਹਿ ਕੌਣ ਗੁਰਮੁਖ ਕਹਿ ਰਿਹਾ ਕੋਈ ਗੁਰਮੁਖ ਕਹਿ ਰਿਹਾ ਕੋ ਵੀ ਕਹਿ ਰਿਹਾ ਠੀਕ ਹੈ ਕਿ ਤੂੰ ਆਪਣੇ ਪਿਰ ਦੀ ਗੱਲ ਸੁਣ ਉਹ ਮਨ ਨੂੰ ਸੁਧਾਰ ਦੂਗਾ ਤੂੰ ਮਨ ਨਾਲ ਨਾ ਜੁੜ ਨਹੀਂ ਨੂੰ ਕਹਿੰਦੇ ਤੂੰ ਸੁਣ ਮੈਂ ਤੋ ਮੈਂ ਸਮਝ ਲਈ ਗੱਲ ਤੇਰਾ ਬੇਰਾ ਮਨਾਨੂੰ ਸਾਰੇ ਜੁਗਲੇ ਮਨਾਨੂੰ ਸਦਾ ਹਲਵਾ ਤੂੰ ਜੋ ਕਹਿ ਰਹੀ ਹੈ ਸੱਚ ਹੈ ਬਿਲਕੁਲ ਉਹਦੇ ਨਾਲ ਸਾਰੀ ਦੁਨੀਆ ਦਾ ਸੁਧਾਰ ਹੋਊਗਾ ਹੀ ਹੋਊਗਾ ਉਹ ਗੱਲ ਨੂੰ ਕਰ ਰਹੀ ਹੈ ਬੋਲ ਰਹੀ ਹੈ ਅੱਛਾ ਜੀ ਹਾਂ ਵੀ ਗੁਰਬਾਨੀ ਹੈ ਹਰ ਕਿਸਮ ਦੇ ਮਨ ਨੂੰ ਵਰ ਪ੍ਰਕਾਰ ਦੇ ਹੋਂਦ ਦੇ ਸੁਧਾਰ ਲੈ ਕੇ ਉਹ ਨੂੰ ਆਤਮਾ ਮੁਕਤ ਕਰ ਸਕਦੀ ਹੈ ਉਹ ਦਵਾ ਸਕਦੀ ਹੈ ਆ ਗੱਲ ਹੈ ਅੱਛਾ ਦੁਰਜਨ ਸੇਤੀ ਨਹਿ ਰਚਾਇਓ ਦਸੀ ਵਿਖਾ ਮੈਂ ਕਾਰਨ ਪੂਣੀ ਨਾਹੀ ਝੂਣੀ ਨਾਹੀ ਨਾਹੀ ਕਿਸੇ ਵੀ ਹੋਣੀ ਦੁਰਜਨ ਦੇ ਨਾਲ ਮੈਂ ਨਿਉ ਰਚਾ ਲਿਆ ਸੀ ਦੁਰਜਨ ਮਨ ਦੁਰਜਨ ਸੀ ਦੂਰੀ ਤਾਇਆ ਕਰਕੇ ਰੱਖਣ ਵਾਲਾ ਅਲੱਗ ਹੋਇਆ ਹੋਇਆ ਸੀ ਆਪਣੀ ਉੱਤਰਾਤਮਾ ਨਾਲ ਇਹਦੇ ਨਾਲ ਮੈਂ ਗੱਲ ਸੀ ਅਸਲ ਬਿਮਾਰੀ ਇਹ ਸੀ ਦੱਸੀ ਵਿਖਾ ਮੈਂ ਕਾਰਨ ਇਹੀ ਮੈਨੂੰ ਵਿਖਿਆ ਕਾਰਨ ਦੱਸਿਆ ਗਿਆ ਇਹੀ ਮੈਂ ਕਾਰਨ ਵਿਖਿਆ ਇਹੀ ਮੈਨੂੰ ਦੱਸਿਆ ਗਿਆ ਮੈਂ ਸਮਝ ਲਿਆ ਕਾਰਨ ਇਹ ਹੈ ਮੈਂ ਮੰਨਦੇ ਨਾਲ ਜਿਹੜੀ ਸੀ ਡੇਟ ਤਾਂ ਰੇਸ਼ੀ ਰੱਖਣੀ ਮੰਨੋਂ ਦੂਰੀ ਬਣਾਉਣੀ ਸੀ ਹੁਣ ਸੋ ਮੈਂ ਮੰਨੋਂ ਦੂਰੀ ਬਣਾਈ ਹੈ ਮੰਨਦੇ ਉਤੇ ਪ੍ਰੈਸ਼ਰ ਪਾਇਆ ਵੀ ਤੈਨੂੰ ਇਹ ਗੁਰੂ ਦੀ ਗੱਲ ਮੰਨਣੀ ਪਊਗੀ ਇਹਦੇ ਵਿੱਚੇ ਸਾਡੀ ਭਲਾਈ ਹੈ ਇਹਦੇ ਵਿੱਚੇ ਅਸੀਂ ਕੁਝ ਇਥੋਂ ਲੈ ਕੇ ਜਾ ਸਕਦੇ ਹਾਂ ਉਰੀ ਨਹੀਂ ਝੂਰੀ ਨਹੀਂ ਨਹੀਂ ਕਿਸੇ ਵੀ ਹੁੰਦੀ ਤੇਰੀ ਹੈ ਕੋਈ ਹੁਣ ਨਹੀਂ ਗੱਲ ਦੇ ਵਿੱਚ ਜਿਹੜੀ ਗੁਰਬਾਣੀ ਹੈ ਝੂਰੀ ਨਹੀਂ ਹੈ ਕਿਸੇ ਕਿਸਮ ਦੇ ਵਿੱਚ ਇਹਦੇ ਵਿੱਚ ਕਵੀ ਨਹੀਂ ਹੈ ਕਿ ਤੋ ਇਹਨੂੰ ਪਰਮ ਨਹੀਂ ਹੈ ਕਿਸੇ ਗੱਲ ਵਿੱਚ ਛੁਪਦਾ ਨਹੀਂ ਹੈ ਕਿਸੇ ਗੱਲ ਦੀ ਕੋਈ ਹੁਣ ਤਾਂ ਨਾ ਕੋਈ ਸ਼ੁਤਾਲੀ ਗੱਲ ਹੈ ਨਹੀਂ ਕਿਸੇ ਵੀ ਹੋਣੀ ਨਹੀਂ ਕਿਸੇ ਵੀ ਗੁਣ ਤੋਂ ਵੀ ਹੈ ਕਿ ਆ ਨਹੀਂ ਹੈ ਸਾਰੇ ਗੁਣ ਭਰਪੂਰ ਨੇ ਇਹਦੇ ਵਿੱਚ ਗੁਣੇ ਗੋਣ ਨਹੀਂ ਉਗੜ ਨਹੀਂ ਕੋਈ ਦੀ ਹਾਂਜੀ ਫਿਰ ਚੈਲ ਚਬੀਲਾ ਛੱਡ ਗਵਾਇਓ ਦੁਰਮਤ ਕਰਮ ਵੀ ਹੋਣੀ ਜਿਹੜੀ ਬੁੱਧੀ ਨੇ ਐਸਾ ਸੰਚਵੀਲਾ ਫਿਰ ਛੱਡ ਦਿੱਤਾ ਉਹਨੇ ਤਾਂ ਆਪਣਾ ਆਪ ਸਾਰਾ ਕੁਝ ਗਵਾ ਲਿਆ ਔਗਣ ਦੇ ਨਾਲ ਸੁਪਰ ਔਗਣ ਨੇ ਦੁਰਮਤੀ ਕਰਮ ਵੀ ਹੋਣੀ ਉਹ ਦੁਰਮਤੀ ਹੈ ਉਹ ਕਰਮ ਵੀ ਹੋਣੀ ਉਹ ਦੁਰਮਤੀ ਨੂੰ ਲਈ ਬੰਦ ਜਿਹੜੇ ਲੋਕ ਉਹਨਾਂ ਦੀ ਬੁੱਧੀ ਦਾ ਨਾਸ ਹੋ ਚੁੱਕਿਆ ਉਹਨੇ ਸਭ ਕੁਝ ਗਵਾ ਲਿਆ ਉਹ ਤੁਰ ਗਾਜ ਬੀਉਦੇ ਤੇ ਕੋਈ ਕਿਰਪਾ ਦੀ ਉਹ ਦੁਰਬਤੀਏ ਸਾਰੇ ਹਾਂਜੀ ਨਾ ਹਾਂ ਭੁੱਲੀ ਨਾ ਹਾਂ ਚੁੱਕੀ ਨਾ ਮੈਂ ਨਾ ਹੀ ਦੋਸਾ ਜਿੱਤ ਹਾਂ ਲਾਈ ਤੇ ਤਹਾਂ ਲੱਗੀ ਤੂੰ ਸੁਣ ਸੱਚ ਸੰਦੇਸਾ ਅਗੋ ਜਵਾਬ ਆਦਾ ਇਹਦਾ ਤਾਂ ਗੁਰਬਾਣੀ ਪੜਨੀ ਸਮਝ ਲਈ ਉਹਦੇ ਹੁਣ ਤਾਂ ਜਵਾਬ ਸਹੀ ਦੇਤਾ ਨਾ ਹਾਂ ਭੁੱਲੀ ਨਾ ਹਾਂ ਚੁੱਕੀ ਨਾ ਮੈਂ ਭੁੱਲੀਆਂ ਨਾ ਚੁੱਕੀ ਨਾ ਮੈਂ ਹਰੀ ਦੋਸਾ ਨਾ ਮੇਰੇ 'ਚ ਕੋਈ ਦੋਸਾ ਹੈ ਜੇ ਤਾਣ ਲਾਈ ਤੇ ਤੋ ਲੱਗੀ ਤੂੰ ਉਸਦੀ ਸੱਚ ਸੰਦੇਸ਼ਾ ਸਾਡਾ ਸੁਣਿਆ ਤੂੰ ਵੀ ਸੁਣ ਲੈ ਉਹ ਤੱਕ ਗਿਆ ਨੂੰ ਕਹਦੀ ਐ ਤੂੰ ਵੀ ਅੰਦਰੇ ਸੀ ਤੂੰ ਰਹਿ ਤੇ ਬਿਨਾ ਕਦੇ ਨਹੀਂ ਬੰਦੀ ਤੇਰੀ ਵੀ ਰਹਿ ਨਾਲ ਹੁੰਦੀ ਸੀ ਚਾਹੇ ਛਾਂ ਮੇਰੀ ਹੁੰਦੀ ਸੀ ਪਰ ਹਾਰ ਵਿੱਚ ਤੇਰੀ ਵੀ ਰਹਿ ਹੋ ਜਾਂਦੀ ਤੇਰਾ ਵੀ ਇਸ਼ਾਰਾ ਹੁੰਦਾ ਸੀ ਤਾਂ ਇਹ ਕਬੂਰਤ ਹੀ ਚੱਲਦਾ ਰਿਹਾ ਜੇ ਹਰ ਫਾਸਟ ਸਟੈਂਡ ਲਈ ਅੰਦਰੋਂ ਸਾਇਰੇ ਸਖਤ ਤੇ ਮੇਰੀ ਹਿੰਮਤ ਹੈ ਮੈਂ ਦੂਏ ਪਾਸੇ ਮੰਨ ਲੈਣਾ ਹੋਰ ਜਾ ਸਕਦਾ ਕਮਜ਼ੋਰੀ ਸੀ ਚਿੱਤ ਵਿੱਚ ਸੀ ਹੌਂ ਵਿੱਚ ਆਇਆ ਹੌਂ ਵਿੱਚ ਗਿਆ ਜਦੋਂ ਇਹ ਰੋਹ ਦੂਏ ਦੇ ਬੇ ਛੜਦੀ ਰੋਹ ਛੜਣੀ ਜ਼ਰੂਰੀ ਸੀ ਪਹਿਲਾਂ ਸਿਆਣੇ ਨੂੰ ਆਪਣਾ ਔਗਣ ਛੱਡਣਾ ਚਾਹੀਦਾ ਹੈ ਤੇ ਆਪਣਾ ਛੱਡਦਾ ਜਦੋਂ ਹਾਨ ਕਲੀ ਮੈਂ ਆਪੇ ਨੂੰ ਗਲੂ ਉਹ ਹੋ ਬੈਵੇ ਪਿੱਛੋਂ ਜਾਏ ਹਾਂਜੀ ਸਾਈ ਸੁਹਾਗਣ ਸਾਈ पागण. ਜੈ ਪਰ ਕਿਰਪਾ ਧਾਰੀ ਫਿਰ ਔਗਣ ਤਿਸਕੇ ਸਭ ਗਵਾਏ ਗਲ ਸੇਤੀ ਲਾਇ ਸਵਾਰੀ ਸਾਈ ਸੁਹਾਗਣ ਸਾਈ ਭਾਗਣ ਉਹੀ ਸੁਹਾਗਣ ਹੈ ਉਹੀ ਭਾਗਾਂ ਵਾਲੀ ਹੈ ਜੈ ਪਰ ਕਿਰਪਾ ਧਾਰੇ ਜਿਹਦੇ ਉਤੇ ਫਿਰ ਵੀ ਕਿਰਪਾ ਕਰਤੀ ਕਰਜੇਤੀ ਲੈ ਸواری ਫੇਰ ਗੜਨਾਂ ਲਾ ਕੇ ਸواری ਫਿਰ ਬਵੇਕ ਬੁੱਧੀ ਬਣਾਤੀ ਫਿਰ ਸਾਫ ਸੁਥਰੀ ਬਤ ਕਰ ਫਿਰ ਗਲਤ ਸੋਚ ਉਹਦੀ ਸਾਰੀ ਖਤਮ ਕਰਤੀ ਫਿਰ ਉਹਦੇ ਅੰਦਰੋਂ ਨਫਰਤ ਖਤਮ ਕਰਤੀ ਫਿਰ ਉਹਦੇ ਅੰਦਰੋਂ ਬੈਰ ਵਿਰੋਧ ਖਤਮ ਕਰਤਾ ਫਿਰ ਉਹਦੇ ਅੰਦਰੋਂ ਕਾਂਕ ਕ્રોਧ ਲੋਭ ਖਤਮ ਕਰਤਾ ਹਾਂਜੀ ਕਰਮ ਠੀਣ ਤਨ ਕਰੇ ਬਿਨੰਤੀ ਕਦ ਨਾਨਕ ਆਵੇ ਵਾਰੀ ਸਭ ਸੁਹਾਗਣ ਮਾਣੇ ਰਲੀਆਂ ਇੱਕ ਦੇਵੋ ਰਾਤ ਮੁਰਾਰੀ ਕਲ ਮੀੜ ਤਾਨੈ ਬੇਇਤੀ ਕਰਦੀ ਐ ਕਦ ਨਾਨਕ ਆਵੇ ਵਾਰੀ ਨਾਨਕਾ ਹੁਣ ਵਾਰੀ ਕਾਦਾ ਹੋਊਗੀ ਮੇਰੀ ਮਿਲੂ ਰੁੱਖਾ ਜਨਮ ਕਲ ਮਿਲੂ ਰਲੀਆਂ ਸਾਰੀਆਂ ਸੁਹਾਗਣਾਂ ਤਾਂ ਬਾਣੇ ਰਲੀਆਂ ਸੱਚ ਸਾਰੇ ਇੱਕ ਰਲੇ ਹੋਏ ਨੇ ਇੱਕ ਗੱਲ ਓ ਰਲੀਆਂ ਮਾਣਦੇ ਨੇ ਰਲੇ ਹੋਏ ਨੇ ਨਾ ਗੱਲ ਇੱਕ ਸਾਰਿਆਂ ਦੀ ਭਗਤਾਂ ਦੀ ਮੋਰਨੇ ਰਣਿਯੋ ਇੱਕ ਦੇਵੋ ਰਾਤੀ ਮੁਰਾਰੀ ਮੈਨੂੰ ਵੀ ਇੱਕ ਅੰੰਦ ਰਾਤੀ ਸ਼ੁਤੀ ਦੇ ਦੇਵੋ ਤੇਨੂੰ ਵੀ ਐਸੀ ਬਵੇਖ ਬੁੱਧੀ ਦੇ ਦੇਵੋ ਮੁਰਾਰੀ ਕਿਨੂੰ ਨੇ ਉਹ ਮੇਰੇ ਔਗਣ ਦੁਸ਼ਮਣ ਹੈ ਨਾ ਮਾਰਨ ਵਾਲਾ ਮੁਰਾਰੀ ਤਾਲ ਗੁਰ ਅਰੀ ਮੇਰੇ ਦੁਸ਼ਮਣਾਂ ਦਾ ਦੁਸ਼ਮਣ ਮੇਰੇ ਔਗਣਾਂ ਦਾ ਦੁਸ਼ਮਣ ਠੀਕ ਹੈ ਸਭ ਸੁਹਾਗਣੀ ਮਾਣੇ ਰਲੀਆਂ ਇੱਕ ਦੇਵੋ ਰਾਤੀ ਮੁਰਾਰੀ ਹਾਂ ਐਸੀ ਮੈਨੂੰ ਵੀ ਬੁੱਧੀ ਦਿਓ ਜਿਹੜੀ ਤੇਰੇ ਨਾਲ ਗੱਲ ਵੀ ਹੋਵੇ ਉਹ ਤਾਂ ਮੈਂ ਵੀ ਆਪਣਾ ਰੰਗ ਘਾੜ ਲਾਣਾ ਦਲੇਲ ਰਾਤੀ ਮਤਲਬ ਰਾਤ ਹੈ ਰਾਤੀ ਲਫ਼ਜ਼ ਹੈ ਹੋਈ ਰਤੀ ਹੋਈ ਹੈ ਨਾ ਉਹ ਤਾਂ ਦਿਜਾਈਦਾ ਉੱਥੇ ਰਾਤ ਤੇ ਚਾਈਦੀ ਹੈ ਰਾਤ ਨੇ ਰਹਿਣਾ ਗਿਆਨ ਉੱਥੇ ਤਾਂ ਦਿਜ ਉਹਨਾਂ ਦਾ ਹੈ ਜੀ ਜੀਵ ਇਸਤਰੀ ਅਰਜੋਈ ਕਰਦੀ ਹਾਂ ਨਾਨਕ ਦੀ ਕਦੋਂ ਵਾਰੀ ਆਵੇਗੀ اے ਪ੍ਰਭੂ ਸਾਰੀਆਂ ਸੁਆਗਣਾ ਮੋਜਾਂ ਮਾਣ ਰਹੇ ਆਂ ਮੈਨੂੰ ਵੀ ਮਿਲਣ ਲਈ ਇੱਕ ਰਾਤ ਦੇ ਰਾਤ ਸਿਹਾਰੀ ਵਾਲੀ ਨੂੰ ਰੱਤੀ ਹੋਈ ਨਹੀਂ ਸਮਝਦੇ ਸਮਝਦੇ ਆਂ ਦਿਨੋਂ ਰਾਤ ਉਹ ਮਾਇਆ ਦੇ ਵਿੱਚ ਨੇ ਮਾਇਆ ਦੇ ਦਿਵਸ ਰਾਤ ਜਦ ਆਉਂਦਾ ਉਹ ਤਾਂ ਠੀਕ ਹੈ ਕਿ ਦਿਵਸ ਦੇ ਨਾਲ ਰਾਤ ਆਊਗਾ ਹਾਂਜੀ ਹਾਂਜੀ ਹਾਂ ਜਿੰਨ ਦਿਨ ਕਰਕੇ ਕੀਤੀ ਰਾਤ ਇਹ ਵੀ ਠੀਕ ਹੈ ਇਹ ਵੀ ਰਾਤ ਵਾਸਤੇ ਆਉਂਦਾ ਬੁਰਾਰੀ ਤੇ ਅਗਿਆਮਤਾ ਦੀ ਬੁਗੜੀ ਬੁਰਾਰੀ ਤੇ ਚਰਨ ਕੁਕੜੀ ਰੋਟੀ ਦੇਖੋ ਰਾਤ ਬੁਰਾਰੀ ਹੈ ਜਦ ਇਹ ਬੁਰਾਰੀ ਮੇ ਜੀ ਨੂੰ ਗੁਰਮੁਖ ਕੋਈ ਦਿਓ ਗੁਰਮੁਖੀ ਬੁੱਤੀ ਜਿਹੜੀ ਮੈਨੂੰ ਵੀ ਜੀ ਤੋ ਮੈਂ ਲਾ ਗੱਲ ਤਾਂ ਆ ਹੈ ਉਹ ਰਾਤ ਤਾਂ ਵਿਆਨਤਾ ਵੱਲ ਨੂੰ ਜਾ ਕੇ ਤਾਂ ਫਲ ਨਹੀਂ ਆਹ ਹਾਂ ਬੜੀ ਦੀ ਸਕਦੀ ਗੱਲ ਇਹ ਨਹੀਂ ਬਣ ਸਕਦੀ ਚਾਨਣ ਵੱਲ ਨੂੰ ਜਾਣ ਦੀ ਤਾਂ ਗੱਲ ਹੈ ਦੀਵਾ ਬੜੇ ਅੰਧੇਰਾ ਚਾਏ ਅੰਧੇਰਾ ਦੂਰ ਕਰਨਾ ਉਹ ਰਾਤ ਨੂੰ ਇਹ ਹੋ ਸਕਦਾ ਜ਼ਿੰਦਗੀ ਦੇ ਦਿਓ ਬਦੂ ਜੀਵਨ ਦੇ ਦਿਓ ਪਰ ਜੀਵਨ ਤਾਂ অলਰੀਡੀ ਹੈ ਜਦ ਬੋਲਦੇ ਠੀਕ ਹੈ ਜੀ ਜਿੰਨ ਰਾਤ ਆਉਂਦਾ ਬਹੁਤਾ ਦਿਨਸ ਰਾਤ ਆਉਂਦਾ ਅੱਛਾ ਪਰ ਦਿਨ ਹਮੇਸ਼ਾ ਜਾਂ ਦਿਨ ਸੀ ਨਾਲ ਚੱਲਦਾ ਹੈ ਇਹ ਚੱਲੂਗਾ ਉਹ ਇੱਥੇ ਦੇਹ ਹੈ ਦਿਨ ਨਹੀਂ ਆ ਰਿਹਾ ਇੱਥੇ ਸਿਰਫ ਕਲਾ ਰਾਤ ਆ ਰਿਹਾ ਉਹ ਉਹਨਾਂ ਨੂੰ ਭਲੇਖਾ ਪੈ ਰਿਹਾ ਹਾਂਜੀ ਹਾਂਜੀ ਅਰਤੀ ਹੋਈ ਰੱਬ ਜਿਹੜਿਆ ਹੋਇਆ ਚੋਰ ਤੇ ਰੰਗੇ ਕੇ ਰੰਗ ਪੂਰਾ ਰੰਗ ਉਹ ਰਤ ਕਿੱਥੇ ਗਿਆ ਸਭ ਰਾਤੀ ਸੁਹਾਗਣੀ ਮੈਂ ਦੁਹਾਗਣ ਰਾਤ ਮਨ ਦੁਹਾਗਣ ਜਿਹੜੀ ਸੁਹਾਗਣੀ ਆ ਨਾ ਚੜ੍ਹਦੀਆਂ ਮੈਂ ਅਜੇ ਤੱਕ ਰਹੀਆਂ ਪੂਰਾ ਰੰਗ ਨਹੀਂ ਆਇਆ ਅੱਛਾ ਇੱਥੇ ਵੀ ਰਤਣ ਵਾਸਤੇ ਆਊਗਾ ਜਿਹੜੀਆਂ ਰੱਤੀਆਂ ਹੋਈਆਂ ਨੇ ਸਭ ਸੁਹਾਗਣਾਂ ਨੇ ਕਿਉਂਕਿ ਮੈਂ ਤਾਂ ਅਗੜਾ ਜੋ ਮੇਰਾ ਸੰਪੂਰਨ ਹੋਇਆ ਨਹੀਂ ਠੀਕ ਹੈ ਬਾਅਦ ਕਿਹਾ ਜੋ ਕੋਈ ਹਾਲੀ ਕੇਕ ਸਭ ਸੁਹਾਗਣ ਮਾਣੇ ਰਲੀਆਂ ਇੱਕ ਦੇਵੋ ਦੇਵੋ ਮੰਗਦੇ ਆ ਦੇਵੋ ਤਾਂ ਕੀ ਬਣਦਾ ਫਿਰ ਦੇਵੋ ਇੱਕ ਦੇਵੋ ਰਾਤੀ ਇੱਕ ਕੋਈ ਗੁਰਬਖਸ਼ੀ ਬੁੱਧੀ ਮਹਨੂਬੀ ਮੈਨੂੰ ਪੜਾਵੇ ਇਹ ਗੱਲ मेरे ਤੇਰਾ ਵਿਚਾਰੇ ਠੀਕ ਹੈ ਜੀ ਕਿਉਂਕਿ ਇਹ ਦਿਨ ਰਾ ਦਿਨ ਵਾਲੇ ਮਿਲ ਕੇ ਆਉਂਦਾ ਸ਼ਬਦ ਜਿੱਥੇ ਵੀ ਗੁਰਬਾਣੀ ਚ ਰਾਤੀ ਅੱਖਰ ਆ ਰਿਹਾ ਦਿਨ ਸੀ ਦੇ ਨਾਲ ਆਉਂਦਾ ਹਮੇਸ਼ਾ ਹੀ ਇਹ ਸਮਝ ਗਵਾ ਹਾਂ ਹਾਂ ਜੀ ਜਿਹੜੀ ਕੱਲੀ ਰਾਤੀ ਆਈ ਹੈ ਆਪਾਂ ਰੱਬ ਹੋਗ ਲਾ ਸਾਇਬ ਰੂ ਗੂਬ ਜੇ ਪਰਮਾ ਦਾ ਤਾਂ ਸਾਇਬ ਰਾਤੀ ਹੈ ਜਿਹੜੀ ਅੱਛਾ ਜੀ ਤਾਂ ਇਹਦਾ ਮਤਲਬ ਸਿਰਫ ਰਾਮਕਲੀ ਰਾਗ ਵਿੱਚ ਦੋ ਜਗ੍ਹਾ ਇਹ ਰਾਤੀ ਜਿਹੜਾ ਸ਼ਬਦ ਆਉਂਦਾ ਇਹ ਵਾਸਤੇ ਆਉਂਦਾ ਠੀਕ ਹੈ ਜੀ ਜੀ ਹਾਂ ਜੀ ਪਰ ਕਾਢ ਤੋਂ ਵੀ ਪਤਾ ਲੱਗਦਾ ਰਾਤ ਬਤਰਾ ਦਾ ਫਤਰੀ ਦਾ ਅਰਥ ਹੁੰਦਾ ਹੈ ਗੁਜਰਨ ਹੈ ਉਹ ਫੇਰ ਰਾਤ ਲੱਗਣੀ ਹੈ ਠੀਕ ਹੈ ਜੀ ਤੇ ਇੱਥੇ ਇਹ ਪਤਾ ਲੱਗਦਾ ਕਿ ਬਾਕੀ ਹਮੇਸ਼ਾ ਹੀ ਰਾਤ ਦੇ ਜਿਹੜਾ ਸ਼ਬਦ ਹੈ ਇਹਦੇ ਨਾਲ ਦਿਨ ਸ ਜਾਂ ਦਿਨ ਆਉਂਦਾ ਇੱਥੇ ਰਾਤ ਦੇ ਨਾਲ ਦਿਨਸ ਨਹੀਂ ਆਇਆ ਇਹਦਾ ਮਤਲਬ ਜਿਹੜੇ ਆਪਾਂ ਅਰਥ ਕਰਾਂਗੇ ਉਹ ਰਤੀ ਹੋਈ ਬੁੱਧੀ ਦੇ ਕਰਾਂਗੇ ਹਾਂਜੀ ਹਾਂ ਮਹੱਲਾ ਪੰਜਵਾਂ ਕਾਹੇ ਇਹ ਮੇਰੇ ਮਨ ਤੋਂ 2 ਲੱਖ ਪਰ ਜਿਹੜਾ ਹੈਗਾ ਉਹਦਾ ਤੇਰੀ ਹਰ ਇੱਛਾ ਪੂਰੀ ਕਰਨ ਤੇ ਸਬਰਤ ਤੇਰੀ ਹਰ ਇੱਛਾ ਉਸ ਨਾ ਕਰਨ ਤੇ ਸਬਰਤ ਹੈ ਸਤਗੁਰੂ ਪ੍ਰਖਿ ਕਿ ਆਇਆ ਤੂੰ ਸਭ ਦੁੱਖ ਵੀ ਇਸ ਕਰਕੇ ਜਿਹੜਾ ਸਤਗੁਰੂ ਤੁਰਖ ਹੈ ਕੀ ਕਰ ਰਿਹਾ ਹੈ ਕੀ ਕਰੂਗਾ ਧਿਆਨ ਰੱਖ ਕੀ ਹੋ ਰਿਹਾ ਹੈ ਤੂੰ ਸਭ ਦੁੱਖ ਕਿਉਂ ਆ ਰਹੇ ਨੇ ਇਹ ਦੁੱਖ ਨੇ ਆ ਕਿਉਂ ਹੋ ਗਿਆ ਇਹ ਸਭ ਕਿਸਰ ਜਾਣ ਕਿਉਂ ਰਿਹਾ ਹੁਕਮ ਨਾ ਹੋ ਰਿਹਾ ਕਿਉਂ ਕੁ ਥੋ ਰਿਹਾ ਭਲਾ ਹੋ ਰਿਹਾ ਇਸ ਤਰੀਕੇ ਨਾਲ ਦੁੱਖ ਮਿੱਤਰ ਜਾਣਗੇ ਦੁੱਖ ਦੁੱਖ ਬਦੂਖ ਦੀ ਛੁੱਟ ਗਈ ਪਹਿਲੀ ਪੰਕਤੀ ਚ ਜਿਹਨੂੰ ਹਰ ਕੇ ਆ ਉਹਨੂੰ ਫਿਰ ਸਤਗੁਰ ਪੁਰਖ ਕਹੇ ਦੂਸਰੀ ਪੰਕਤੀ ਚ ਹੈ ਜੀ ਹਰ ਨਾਮਾ ਆਰਾਧ ਮਨ सब के लवेख जाहे विकार जिनको पूर्व लिखिया तिन रंग लगा निरंकार हे हर, हर नाम भंद कहा जप लिया हुन कर जेड तुर्की बिना ता के छोड़ने वाले दी जड़ा फुरना अंतरो बोलना तुमरदास को फुरया तेरे अंदरो फुरूगा ਸਭ ਕਿਲੇ ਵਿਖੋ ਚਾਹੇ ਵਿਕਾਰ ਜਿੰਨਾ ਕਿਲੇ ਵਿਖੋ ਉਹ ਵਿਕਾਰ ਸਾਰੇ ਚਲੇ ਜਾਂਦੇ ਹਾਂਜੀ ਜਿੰਨ ਕੋ ਪੂਰਵ ਲਿਖਿਆ ਤਿੰਨ ਰੰਗ ਲਗਾ ਨਿਰੰਕਾਰ ਜਿੰਨਾਂ ਦਾ ਪਹਿਲਾਂ ਹੀ ਲਿਖਿਆ ਹੋਇਆ ਅੰਦਰ ਨੂੰ ਰੰਗ ਕਰਤਾ ਦਾ ਰੰਗ ਚੜ ਜਾਂਦਾ ਜਾਂਦਾ ਜਿਹੜੇ ਬਚਪਨ ਤੋਂ ਹੀ ਪਹਿਲਾਂ ਤੋਂ ਹੀ ਲਿਖੇ ਨੇ ਜੰਮ ਤੋਂ ਪਹਿਲਾਂ ਹੀ ਕੇ ਰੱਖਿਆ ਅੰਦਰ ਵੀ ਦਾ ਲਾੜੀ ਜਿਹੜੂ ਦਾ ਰੰਗ ਲੱਗ ਜਾਂਦਾ ਫਤੂਰ ਅਲੋੜ ਜੇ ਲਈ ਛੱਡਦੇ ਉਹਨੂੰ ਸੱਚ ਦਾ ਅਲੰਕਾਰ ਚੜ ਜਾਂਦਾ ਹਾਂਜੀ ਉੰਨੀ ਨਾਮ ਅਪਾਰ ਮਾਇਆ ਦੇ ਸਵਾਰਥ ਜਿਹਦੇ ਦੇ ਸਵਾਰਥ ਸਵਾਰਥਾਂ ਕਰਕੇ ਜਿਹੜੀ ਆਪਾਂ ਦਾ ਤਨ ਇਕੱਠਾ ਨਾਪਤਾਂ ਦੇ ਭੰਡਾਰ ਭਰ ਲੈ ਖਿਆਲੇ ਭਰ ਲੈ ਹੋ ਜੀ ਠੇ ਪਹਿਰ ਇਕ ਤੈ ਲਿਵੈ ਮਨੇਨ ਹੁਕਮ ਅਪਾਰ ਇਕ ਕ ਲੈਵਰੇ ਇਨੇ ਠੇ ਪਹਿਰ ਕਿ ਕਮਾਨੇ ਨਾਲੇ ਜੁੜੇ ਰਹਿੰਦੇ ਨੇ ਕੋ ਬਹਾਉਣੀ ਨਾਲੇ ਕਰਦੇ ਰਹਿੰਦੇ ਨੇ ਕੁਰਬਾਨੀ ਕਿਵੇਂ ਆਈ ਸਾਰੇ ਸੰਸਾਰ ਕਰਨਾ ਇਹ ਜੁਸਤਿ ਨੂੰ ਵਿੱਚ ਲੱਗੇ ਰਹੇ ਅੱਛਾ ਇਹਦੇ ਭਾਵੇਂ ਤਾਂ ਵੀ ਅੱਠ ਗੁਣ ਪਹਿਰ ਕੇ ਰਹਿੰਦੇ ਆ ਉਹ ਇਕੱਤੇ ਹੋਏ ਅੱਠੇ ਪਹਿਰ ਹੁਕਮ ਅਪਾਰ ਅਪਾਰ ਹੁਕਮ ਤੇ ਬਿਚ ਨੇ ਹੁਣ ਹੁਕਮ ਨਾਲੇ ਪਰ ਉਹਨਾਂ ਦੀ ਇੱਛਾ ਰਹੀ ਹੈ ਸਾਧ ਜੀ ਹੁੰਦਾ ਹੈ ਜਗ ਵਿੱਚ ਮੁਖ ਤੇ ਹਰ ਜਿੱਤ ਮਨ ਚੁੱਤ ਵਿਚਾਰ ਹੈ ਦੇਹ ਅਤੇ ਨਿਤ ਜਦ ਅਨਹਾਵ ਤੇਰੇ ਭਵ ਸਾਧਰ ਤਾਰੇ ਕਿਵੇਂ ਲੜਾਈ ਲੜਦੀਆਂ ਸੱਚੀ ਵੀ ਉਹਦੀ ਪਲੈਨਿੰਗ ਕਿਵੇਂ ਸੱਚ ਨੂੰ ਉੱਪਰ ਲੈ ਆਉਣਾ ਦੂਜਿਆਂ ਪੱਧਰ ਤੇ ਉਹਦੀ ਪਲੈਨਿੰਗ ਵੀ ਵਿਚਾਰ ਤੇ ਵਿਝੜੇ ਰਹਿੰਦੇ ਨੇ ਸਾਡਾ ਜੀਉ ਤੈਜ ਦਾ ਉਪਦੇਸ਼ ਗੁਰੂ ਨਾਲ ਤਾਂ ਕੁਰਬਾਨੀ ਦੀ ਬਿਆਖਿਆ ਉਪਦੇਸ਼ ਕਰਦੇ ਨੇ ਚਿੱਤ ਨੂੰ ਸ਼ੁੱਧ ਵਿਚਾਰਾ ਵਿਰੋਧੀ ਕਿਵੇਂ ਬੰਦ ਕਰ ਅਸੀਂ ਵਿਰੋਧੀਆਂ ਤੇ ਉਹ ਬੰਦਾ ਖੋ ਕਿਵੇਂ ਦਾ ਪ੍ਰਚਾਰ ਕਰਦਾ ਹੈ ਸਾਰੀ ਗੁਰੀਆਂ ਕਿਵੇਂ ਬੁੱਧ ਸਕਦੀ ਹੈ ਬਹੁਤ ਬਹੁਤ ਲੋਕਾਂ ਕੋਲ ਕਿਵੇਂ ਪਹੁੰਚ ਰਿਹਾ ਹੈ ਹਾਂ ਨਾਨਕ ਮੰਗੇ ਦਾਨ ਇੱਕ ਦੇਹੋ ਦਰਸ ਮਨ ਪਿਆਰ ਕੰਨ ਕੋਈ ਦਾਨ ਬੁਰੀ ਮੈਂ ਤਾਂ ਹੈ ਦਰਸ਼ਨ ਦੇ ਆਤਮ ਖਰਾਮ ਦਾ ਦਰਸ਼ਨ ਚਾਹੀਦਾ ਆਪਣ ਗੁਰ ਦਾ ਦਰਸ਼ਨ ਚਾਹੀਦਾ ਆਪਣ ਰੂਪ ਦੀ ਪਛਾਣ ਚਾਹੀਦੀ ਹਾਂ ਜੀ ਜਿਸ ਤੂੰ ਆਵੇਂ ਚਿੱਤ ਤਿਸ ਨੂੰ ਸਦਾ ਸੁਖ ਜਿਸ ਤੂੰ ਆਵੇਂ ਚਿੱਤ ਤਿਸ ਜਮ ਨਾਹੇ ਦੁਖ ਹਾਂ ਜਿਹਦਾ ਤੂੰ ਚਿੱਤ ਚ ਆਦੇਵੇਂ ਉਹਨੂੰ ਸਦਾ ਸੁਖ ਹੁੰਦਾ ਹੈ ਜਿਹਦਾ ਚਿੱਤ ਤੇ ਵੱਡਦਾ ਠੀਕ ਹੈ ਜੀ ਤੂੰ ਸਤਿਗੁਰ ਨੂੰ ਕਿਹਾ ਜੀ ਇਹ ਹਰ ਨੂੰ ਕਿਹਾ ਇੱਥੇ ਸਤਿਗੁਰ ਨੂੰ ਕਿਹਾ ਸ਼ਬਦ ਗੁਰੂ ਨੂੰ ਕਿਹਾ ਅੱਛਾ ਉਹਨਾਂ ਸ਼ਬਦ ਗੁਰੂ ਤੇ ਚੱਲੇਗੀ ਗੱਲ ਕੱਲ ਹੋਤੇ ਜਾਓ ਸਦਾ ਸੁਖ ਸਦਾ ਸੁਖ ਤਵਦਨ ਵਾਲੇ ਅੱਛਾ ਜੀ ਇਹਦਾ ਸਦਾ ਸੁਖ ਤਿੱਖਾ ਅਲਫ ਸੁਖ ਛਾੜ ਪਰਬ ਸੁਖ ਪਾਵਾ ਇਹ ਤਰੀਆ ਉਹ ਕਰਤ ਠੀਕ ਹੈ ਜੀ ਜਿਸ ਤੋਂ ਆਵੇ ਚਿੱਤ ਤਿਸਕੇ ਕਾੜਿਆ ਕਰਤਾ ਮਿੱਤਰ ਸਭ ਕਾਜ ਸਵਾਰੇ ਜਿਸ ਤੋਂ ਆਵੇ ਜਿਹਦੇ ਚ ਸੁਪਰਗਟ ਹੋ ਕਾੜਿਆ ਉਹਨੂੰ ਕਹਿੰਦੀ ਰਖਨਾਈ ਹੈ ਉਹ ਤਾਂ ਕਰ ਕੋਈ ਔਕਰ ਢੀ ਕਿਤੇ ਇਸੇ ਪਾਸੇ ਚਲਾ ਗਿਆ ਕੋਈ ਔਕਰ ਢੀ ਉਹਦੇ ਵਾਸਤੇ ਜਿਸ ਦਾ ਕਰਤਾ ਮਿੱਤਰ ਸਭ ਕਾਜ ਸਵਾਰੇ ਜੇ ਕਰਤਾ ਜੀ ਦਾ ਕੋਈ ਮਿੱਤਰ ਹੋਵੇ ਕਾਜ ਸਵਾਰੇ ਸਾਰੇ ਕਾਜ ਆਪੇ ਕਰਨ ਨੂੰ ਸਵਾਗਤ ਨੇ ਕਰਤਾ ਫਿਰ ਸ਼ਬਦ ਗੁਰੂ ਹੈ ਜੀ ਅਕਲ ਕਰਤਾ ਹੁਕਮ ਹੈ ਠੀਕ ਹੈ ਜੀ ਪਰ ਪਹਿਲਾਂ ਇਹ ਫਰਮਾਂਚੇ ਤੇ ਕਹੋ ਕਿ ਗਾਂਧੀ ਗੱਲ ਚੱਲ ਰਹੀ ਹੈ ਜੀ ਹਾਂ ਗੱਲ ਜਿਸ ਤੋਂ ਆਵੇ ਚਿੱਤ ਸੋ ਪ੍ਰਵਾਨ ਜਨ ਜਿਸ ਤੋਂ ਸ਼ਬਦ ਜਿਸ ਤੋਂ ਆਵੇ ਚਿੱਤ ਲਿਖਿਆ ਹੋਇਆ ਇੱਛਾ ਦਾ ਉਹ ਸ਼ਬਦ ਵੀ ਹੋਈ ਹੈ ਪ੍ਰਾਪਤੀ ਪੂਰਨ ਹੋਏ ਚਿੱਤ ਇੱਛਾ ਠੀਕ ਹੈ ਜੀ ਜਿਸ ਤੋਂ ਆਵੇ ਚਿੱਤ ਸੋ ਪ੍ਰਵਾਨ ਜਨ ਉਹ ਤਾਂ ਸਮਝੋ ਦਰਗਾਹ ਦੇ ਵਿੱਚ ਪ੍ਰਵਾਨ ਜਿਹਦੇ ਜਿਸ ਤੂੰ ਆਵੇਂ ਚਿੱਤ ਬਹੁਤ ਤੇ ਤੁਨ ਉਹਦੇ ਕੋਲ ਕੀ ਹੈ ਉਹਦੇ ਕੋਲ ਬਿਆੰਕ ਗਿਆਨ ਹੈ ਲੋਕ ਆ ਬਹੁਤ ਬਹੁਤ ਲੋਕ ਤੁਨ ਨਾਲ ਕੋਲ ਠੀਕ ਹੈ ਜਿਸ ਤੂੰ ਆਵੇਂ ਚਿੱਤ ਸੋਹ ਵੱਡ ਪਰਵਾਰਿਆ ਜਿਸ ਤੂੰ ਆਵੇਂ ਚਿੱਤ ਤੇਨੀ ਕੁਲ ਉਧਾਰਿਆ ਜਿਸ ਤੂੰ ਆਵੇਂ ਚਿੱਤ ਵੱਡ ਪਰਵਾਰਿਆ ਬਹੁਤ ਵੱਡੇ ਪਰਵਾਰ ਵਾਲਾ ਹੁੰਦਾ ਤੇਰੇ ਹੁੰਦਾ ਇੱਕ ਪਤਾ ਇੱਕ ਕਿੰ ਆ ਮਬਾਰਕ ਵਾਲਾ ਹੁੰਦਾ ਉਹਦਾ ਕੋਈ ਬਗਾਨਾ ਪੈਰੀ ਹੋਈ ਨਹੀਂ ਉਦੋਂ ਵੱਡਾ ਪਰਿਵਾਰ ਕਿਸੇ ਤੋਂ ਹੁੰਦਾ ਨਹੀਂ ਉਹ ਵੱਡਾ ਹੈ ਨਾ ਕੁੰਲਾ ਉਦਾਰਿਆ ਠੀਕ ਹੈ ਜੀ ਤੇ ਚੱਟਾ ਹੁੰਦਾ ਪਰ ਕੁੰਲਾ ਉਦਾਰ ਕਰਦਾ ਸਾਰੀ ਕੁੰਲਾ ਕੁੰਲਾ ਕਹਿੰਦਾ ਲਾ ਦਿੰਦੇ ਭਗਤਾਂ ਦੀ ਕੁੱਲ ਹੈ ਜੀ ਤਾਂ ਇੱਕੋ ਜਿਹਾ ਸਾਰੀ ਭਗਤਾਂ ਦੀ ਮੈਂ ਕਿਹੜੀ ਦੀ ਗੱਲ ਹੈ ਤਿੰਨੀ ਕੁੱਲ ਉਦਾਰਿਆ ਕੋਲੇ ਨਿਰਾਕਾਰੀ ਕੋਲ ਹੈ ਹਾਂ ਇੱਕ ਬਿਤਾਇ ਕਿੰਨਾ ਕੋਲ ਸਭ ਰਿ ਜੋ ਜੋ ਤੈਸੋ ਚੁਕੀ ਕੋਈ ਨਹੀਂ ਠੀਕ ਹੈ ਜੀ ਉਹਦ ਨੂੰ ਉਪਦੇਸ਼ ਹੈ ਗੁਰਬਾਨੀ ਜੋਦ ਨੂੰ ਜੋਤੀ ਕਦੇ ਕੱਢ ਕੇ ਜੋਦ ਦਾ ਡੇਰਾ ਦੂਰ ਕਰਕੇ ਜਿਤਬਾਨੀ ਕਰਕੇ ਸੱਖਾਂ ਨੂੰ ਯਾਰਈਏ ਸਾਰਿਆਂ ਨੂੰ ਪਾਇਆ ਝੜਵਾ ਲਈਏ ਸਮਝਾ ਕੇ ਹਾਂਜੀ